ਹਾਂਜੀ ਸ਼ਸ਼ਪਦੀ ਕਾਰਮਿਕ ਕਰਾਵਣ ਕਰਨੇ ਜੋਗ ਜੋਤਿਸ਼ ਭਾਵੇ ਸੋਈ ਹੋ ਜਿਹੜਾ ਹੈ ਨਾ ਇਹ ਜੀਵ ਹੈ ਇਹ ਕਾਰਨਾ ਕਰਾਉਣ ਵਾਲ ਕਾਰਨਾ ਕਰਾਉਣ ਜਾਨਵਰਾਂ ਦੇ ਵੀ ਰੂਪ ਦਾ ਆਪਣੇ ਸਰੀਰ ਤੇ ਤਾਂ ਲੈਣੇ ਲੈਂਦੇ ਸਰੀਰ ਆਪਣੇ ਤੋਂ ਵੀ ਕੰਮ ਲੈ ਲੈਂਦਾ ਆਇਆ ਵੇ ਮਹਾਦੇਵ ਜੀ ਤੋਂ ਆਪਣੇ ਤੋਂ ਵੀ ਕੰਮ ਲੈ ਲੈਂਦਾ ਹੋਰ ਜਾਨਵਰੋਂ ਵੀ ਲੈ ਲੈਂਦਾ ਕੋਮ ਇਹ ਯੋਗ ਹੈ ਇਸੇ ਉਹ ਕਾਬਿਲ ਹੈ ਜੇ ਦੂਜੇ ਤੋਂ ਕਰਾਉਣਾ ਹੈ ਫਿਰ ਉਹਦੇ ਜੀ ਅਸੀਂ ਉਹ ਕਰਦੇ ਹੁੰਦੇ ਹਾਂ ਜੇਰਾ ਕਰਾਵਣਾ ਵਾਲਾ ਉਹ ਵੀ ਕਾਹਨਾ ਵਾਲਾ ਹੁੰਦਾ ਇੱਕ ਡਾਇਰੈਕਟ ਕਾਹਨਾ ਹੁੰਦਾ ਇਹ ਸੋਕਾਣਾ ਹੈ ਕਿ ਕਰਾਉਣ ਕਹਿੰਦੇ ਉਹ ਕਰਾਉਣ ਦੇ ਨਾਲ ਜਿਹੜੇ ਕਰਦੇ ਨੇ ਨਾ ਉਹ ਤੇ ਅਜਿਹਾ ਕੰਮ ਕਰਦੇ ਆਂ ਡਰਾ ਕੇ ਇਹ ਇੱਕ ਕਰਨਾ ਉਹ ਉਹਦੇ ਸੁਪਨਾ ਛੱਡ ਪਾ ਜਿਵੇਂ ਜਿਵੇਂ ਜੂਨ ਕਰਾ ਰਹੇ ਕਰਾ ਰਹੇ ਹਾਂਜੀ ਜੋਤਿਸ਼ ਭავਿਸ਼ ਹੋਈ ਹੋਗੀ ਜੋਤਿਸ਼ ਭავਿਸ਼ ਹੋਈ ਹੋਗੀ ਪਰ hota hai ga to koi kitte sa gaya ethe is bhi aauga te tisriyon ko ate is bhi aauga te tis jehda hai ga oh apsangat to bahar hai isni yaad hai ga apsangat is saul do yaar te is se te door hai peche te door ho jaata ਹਰ ਬਾਰ ਸਾਂ ਵਾਸਤੇ ਹੋ ਰਹੇ ਜਹਾਜੇ ਸਾਡੇ ਕੋਲ ਤੋਟੇ ਤੋਟ ਕੇ ਜੋਤਿ ਪਾਉਣਾ ਨਹੀਂ ਨਹੀਂ ਉਹ ਹੋ ਰਿਹਾ ਤੋ ਤਾਂ ਪੈਦੰਟ ਆ ਉਹਦਾ ਹਟੂਗਾ ਨਹੀਂ ਆਪਾਂ ਜਿਹੜਾ ਕਹਿ ਰਿਹਾ ਇੱਥੇ ਆਪਣੇ ਕੋਲ ਹਾਜ਼ਰ ਦੀ ਆਪਾਂ ਗੱਲ ਕਰਦੇ ਹਾਂ ਉਹ ਵਾਸਤੇ ਹਾਂ ਠੀਕ ਹੈ ਜੋ ਤੁਸੀਂ ਭਾਵੇਂ ਸੋਈ ਹੋ ਸੋਈ ਹੋ ਪਰ ਕਾਰਨ ਕਰਾਉਣ ਕਾਰਜਯੋਗ ਤਾਂ ਹੈ ਇਹ ਜ਼ਰੂਰ ਪਰ ਹੁੰਦਾ ਹੈ ਤਾਂ ਜੋ ਪਰਮੇਸ਼ਰ ਨੂੰ ਹੁੰਦਾ ਪਰ ਆਏ ਗੱਲ ਇਹਦੇ ਕੋਲ ਹਾਂ ਭਾਵੇਂ ਕਾਰਨ ਕਰਾਉਣ ਜੋ ਹੈ ਪ੍ਰੈਕਟੀਕਲੀ ਉਹੀ ਕਰ ਸਕਦਾ ਜੋ ਪਰਮੇਸ਼ਰ ਨੂੰ ਕਰਦਾ ਉਗੀ ਸਮਾਪਤ ਤੇ ਸਲਾਮਤ ਤਾਂ ਆਇਆ ਜੇ ਗਲਬਤ ਕਰ ਜਾਂਦੇ ਫਿਰ ਤਾਂ ਪਰਮੇਸ਼ਰ ਗਾਇਬ ਹੋ ਗਿਆ ਉਹ ਜਿਹੜਾ ਅਸੀਂ ਸੋਗ ਰਹੇ ਸੁਈ ਦੀ ਤਰ੍ਹਾਂ ਹਾਂ ਇਹ ਜੀਵੇ ਹੋ ਜੀਵੇ ਉਹ ਕਰਾ ਲੈਂਦਾ ਲੋਕਾਂ ਤੇ ਕਾਫੀ ਵੀ ਦੂਰਾਂ ਦੇ ਵਿਕਰਾ ਲੰਦਾ ਜਾਨਵਰਾਂ ਦੇ ਵੀ ਕਰਾਵਾ ਲੰਦਾ ਸਭ ਆਦਮੀ ਕਬਲ ਲੈਂਦਾ ਹੀ ਆ ਨਾ ਆਪ ਵੀ ਕਰਦਾ ਜਾ ਰਹੇ ਆ ਆਦਮੀ ਕਾਦਮੀ ਥਲੇ ਕਬ ਕਰਦੇ ਨੇ ਉਹ ਬੁੱਧੀਵਾਨ ਨੇ ਜਿਆਦਾ ਬੁੱਧੀਵਾਨ ਹੈ ਕਮ ਪਰ ਅੰਦਰ ਸੁਸਤੀਏ ਲੋਕਾ ਉਹ ਆਪ ਵੀ ਡਰ ਸਿੱਧਾ ਵੀ ਕਰ ਲੈਣਾ ਆਪਣੇ ਉਹ ਜਦ ਕਰਾਉਂਦਾ ਹੈ ਤਾਂ ਕਰਨ ਯੋਗ ਬਣਿਆ ਜਾਂਦਾ ਇੱਕ ਹੋਰ ਸ਼ਕਤੀ ਹੈ ਉਹਦੇ ਕੋਲ ਜਿੰਨੇ ਜਿਆਦਾ ਅੰਦਰ ਥਲੇ ਬਦੇ ਹੋਣਗੇ ਉਹਨਾਂ ਬੁੱਧੀਵਾਨ ਉਹਦੀ ਤਨਸਾ ਉਹਨਾਂ ਉਹਦੀ ਸੂਸਤ ਜਿਆਦਾ ਹੁੰਦੀ ਕਾਫੀ ਜਿਆਦਾ ਕੋਈ ਫਰਕ ਨਹੀਂ ਜਿਆਦਾ ਕੋਈ ਕਾਗਲੀ ਚ ਨਹੀਂ ਹਾਂਜੀ ਜਿੰਮੇ ਥਾਪੜ ਉਹ ਥਾਪਣਾ ਨਹੀਂ ਕਿਸ ਪਾਰਾ ਦੇਖੋ ਹੁਣ ਇਸ ਦੀ ਗੱਲ ਚੱਲਦੀ ਤੇ ਇਸ ਦੀ ਗੱਲ ਚੱਲਦੀ ਮੇਰੇ ਤੋਂ ਇਸ ਦੀ ਗੱਲ ਚੱਲ ਤੇ ਜੀਵ ਦੀ ਸਰੀਰ ਨਾਲ ਕਹਿੰਦਾ ਨਾ ਤੇ ਜੁਰ ਦੇ ਮਾਇਆ ਨਾਲ ਲੱਭ ਜਲਾ ਜਾਣਾ ਉਸ ਨੂੰ ਇਹ ਅੱਲਾ ਟੁੱਟ ਗਿਆ ਚਲ ਹੁਣ ਤੂੰ ਕਿੱਲੇ ਜਾ ਸਿਰਾਂ ਜੋੜਨਾ ਇੱਕ ਵਾਰ ਉਹ ਵੀ ਰੀ ਲਾਈ ਜਾਣੀ ਹੋਵੇ ਜਿਹੜੇ ਐਦਾ ਦਾਪੇ ਚਲੇ ਜਾਣ ਤਾਂ ਇੱਕ ਵਾਰ ਜੋੜ ਤੇ ਦੋ ਨੁਸਤ ਚਲੀ ਜਾ ਪਰਮੇਸ਼ਰ ਜੋ ਹੈ ਉਹਦੇ ਹੁਕਮ ਤੇ ਬਿਨੂ ਨੀਕੀ ਚੋਸ ਜੋ ਤੇ ਸੁਭਾਵ ਹੈ ਹੋ ਕਿਹਨਾਂ ਦਾ تھا ਉਥਾ ਪੜੋ ਉਹਦਾ ਜੀ ਹੈ ਜਿਹੜਾ ਜੀਵ ਹੈ ਉਹ ਆਇਆ ਨਾਲ ਉਹਨੂੰ ਸਾਥ ਦੇ ਬਿਸਕਰਤੇ ਚ ਮਾਇਆ ਨੂੰ ਤੋੜ ਦੇ ਜੋੜ ਦੇ ਇੱਕ ਸਿਕਲਤ ਲੱਭ ਗਿਆ ਉਹਦਾ ਇਟਾ ਸੁਭਰਤਾ ਜੀ ਵੀ ਇਟਾ ਸੁਭਰਤਾ ਬੜੇ ਬੜੇ ਜਹਾਜ਼ ਬੜਵਡੀਆਂ ਚੀਜ਼ਾਂ ਬਣਾ ਲੀਆਂ ਆਦਮੀ ਦੇ ਪਰ ਉਹ ਤਾਂ ਆਦਮੀ ਦੇ ਵਾਸਤੇ ਹੋਤੀ ਆਪਰੇ ਭਰ ਨਾ ਚੱਲ ਰਿਹਾ। ਇਹ ਵੱਡੇ ਵੱਡੇ ਇੰਜਣ ਵੀ ਹੈ। ਕੰਟਰੋਲ ਤਾਂ ਫਿਰ ਵੀ ਆਉਂਦਾ ਹੈ। ਇਸ ਕਰਕੇ ਅਭੀ ਹੀ ਪੜਾਈ ਪਰਮੈਸ਼ਨ ਨਹੀਂ ਜਾਦਾ ਉਸੇ ਤਮ। ਟ੍ਰਟੋਰੋ ਨੇ ਆਪਣੇ ਨੇ ਕਿਹਾ। ਇਹ ਤਾਂ ਕੰਟਰੋਲ ਚੱਲਦਾ ਐ ਵੈਸੇ ਹੁਕਮੋਂ ਦੇ ਚੱਲਦਾ। ਰਿਮੋਟੋਂ ਇਹ ਠੀਕ ਆ ਵੀ ਤੇਲ ਮੀਟਰ ਵੀ ਜੋਮੈਂ। ਖਿਚਲਾ ਮੀਟਰ ਨਹੀਂ ਹੈ। ਪਰ ਥੋੜਾ ਜਿਹਾ ਪ੍ਰੈਸ਼ਰ ਤਾਂ ਪੈਦਾ ਪਾਣੇ ਨਾਲ ਸਲਪਾ ਪਾ ਨਹੀਂ। ਸਦਾ ਦਾ ਆਪਣਾ ਹੀ ਆ ਤੇਰ ਜਾਗਾ ਕਠ ਬਤਾ ਆਪਣੇ ਕਰ ਦਿੱਸਤੇ ਜਿਹੜੀ ਚੀਜ਼ ਬਣਾਈ ਆ ਉਹਦੇ ਤੋਂ ਦੋ ਚ ਰਹੀ ਉਹਦੇ ਤੋਂ ਦੋ ਰਹੀ ਇਹਨੇ ਮਾ ਥਾਪ ਉਥਾਪਣਾ ਥਾਪ ਆਤਮਾ ਨੂੰ ਸਰੀਰ ਨਾਲ ਜੋੜ ਦੇਣਾ ਉਹ ਸਾਫ ਕਰ ਦੇਣਾ ਜਪਣਾ ਬੰਨਾ ਜਪਣਾ ਬੰਨਾ ਕਠ ਦਾ ਕੰਮ ਹੈ ਖੇਤ ਵਿੱਚ ਥਾਪ ਉਹ ਕਨੇਨ ਨੂੰ ਉਹ ਥਾਪਣ ਹਾਰਾ ਐਡੇ ਟਾਈਮ ਕੋਵਾਰਸ ਕਿੰਨੇ ਨੂੰ ਥਾਪੋ ਥਾਪਣਾ ਇਹ ਵੀ ਨਹੀਂ ਹੰਤ ਕੁਸ ਪਰਵਾਰ ਇਹਦੀ ਵੀ ਇੱਕ ਇੱਕ ਨੂੰ ਜੋੜਦਾ ਉਹ ਤੁਹਾਨੂੰ ਵਿਸਥਾਰ ਦੇਵ ਨਹੀਂ ਆਵੇ ਕਿ ਨੂੰ ਜੋੜਦਾ ਕੋਈ ਬਚਾਓ ਲੋਕਾਂ ਉਹ ਤੇ ਆ ਗਏ ਮੂਰਤੀਆਂ ਮਣਾਉਣ ਵਾਲੇ ਉਹ 10 ਕੇ ਲਾਇਆ ਨਾ ਬਚਾਉਣ ਬਣ ਕੇ ਆਈਆਂ ਚੱਲ ਗਈ ਇਹਨਾਂ ਕਬੂ ਉਹ ਦਾ ਕਹਿਣਾ ਵੀ ਇਹ ਨਹੀਂ ਕਰਨਾ ਪਤਾ ਵੀ ਇਸ ਨੂੰ ਕਿ ਦਿਲ ਜੋੜਨ ਨਾਲ ਕੇ ਦਿਲ ਦੋੜਨ ਨਾਲ ਹਾਂ ਕੋਈ ਅੰਤ ਨਹੀਂ ਹੈ ਉਹ ਕੋਈ ਅੰਤ ਨਹੀਂ ਹੈ ਜਦੋਂ ਬਾਰ ਉਹਦਾ ਕੱਥੇ ਆਦਮੀ ਆਪਣੇ ਕੋਲ ਕੀ ਸਮਝਦਾ ਆਦਮੀ ਦਾ ਨਸ਼ਾ ਉਤਾਰਿਆ ਜਾਂ ਫੇਰ ਵੀ ਉਤਰਦਾ ਕਹੇ ਨਾ ਉੱਤਰ ਨਹੀਂ ਹੈ ਨੂੰ ਸਮਝੇ ਨਹੀਂ ਆਈ ਇਹ ਗੱਲ ਕਹੇ ਕਿ ਦਸ਼ਾਤਾ ਜਹੀ ਇਹ ਫਰਮਜਾਇਓ ਕੋਈ ਅਤਨਾ ਪਾਰਾ ਬਾਰਾ ਕਿੰਨ ਨੂੰ ਥਾਪ ਉਥਾ ਕਰ ਦਵੇ ਜਿਹੜਾ ਸਕ੍ਰਿਪਟ ਵਿੱਚ ਤੁਸੀਂ ਹੋ ਫਿਰ ਨਹੀ ਯਾਦਾ ਕੋ ਢਾਪਾ ਹੈ ਹੀ ਨਹੀਂ ਤਰ ਐਕਸ ਕਤਲ ਕਰਿਆ ਬੇ ਕੋਈ ਅਦਰ ਗੱਲਾਂ ਸਮਝਾਉਂਦਾ ਪੜ੍ਹਨ ਲੱਗਾ ਆਤਰ ਹੈ ਗੁਰੂ ਪਰਬਾਹ ਇਹ ਤਾਂ ਇੱਡੀ ਵੱਡੀ ਪਾਵਰ ਦੇ ਸਾਹਮਣੇ ਉਹਨਾਂ ਕੋਲ ਕਿਉਂ ਪਾਵਰ ਆਖਿਵੇਂ ਅਸੀਂ ਕੀ ਲੈਣਾ ਪਰ ਹੈ ਕਿਉਂ ਜਿਹੜਾ ਦੇਖੀ ਹੈ ਨਾ ਕੋਣ ਹੈ ਦੱਸਿਓ ਦੇਖੀ ਹੈ ਸੋ ਬੋਲਣ ਜੋ ਪਿੱਛੇ ਪਹਿਲਾਂ ਦੇਖ ਕੇ ਦਸੀਗਾ ਸਾਡੇ ਵੀ ਸਾਹਮਣੇ ਆ ਦੇਖਣ ਨੂੰ ਪਤਾ ਹੀ ਹੈ ਕਦੇ ਜੀ ਵਰਦਾ ਸਾਰਾ ਕੁਝ ਸਾਹਮਣੇ ਆ ਆਪਣੇ ਹਾਂਜੀ ਹੁਕਮੇ ਤਾਰ ਅਤਾਰ ਜੇ ਹੁਕਮੀ ਜਮਾਵਾ ਪਰ ਇਹ ਪਤਾ ਕੀ ਕਰਦਾ ਇਹ ਜੀ ਕੀ ਕਰਦਾ ਇਹ ਹੁਕਮਾਏ ਤਾਰ ਅੱਤਾ ਰਿਹਾ ਜਦ ਆਪਣਾ ਹੁਕਮ ਦਾ ਅਨਗੱਲਦਾ ਨਾ ਆਪਣੀ ਮਰਜ਼ੀ ਪੈਦਾ ਕਰ ਲੰਦਾ ਆਪਣਾ ਪਾਣਾ ਪੈਦਾ ਕਰ ਲੰਦਾ ਹੁਕਮ ਨੂੰ ਤਰਨ ਕਰ ਲੰਦਾ ਉਹ ਤਰਦਾ ਆਵਾ ਬਾਬਾ ਅਦੂ ਵੀ ਲੜਕਦਾ ਉਹ ਤਾਰ ਬਗੈ ਜਮੀ ਨੂੰ ਲੜਕਦਾ ਫਿਰ ਚਲ ਆਪਣੇ ਪਾਣੇ ਜਾਂਦਾ ਬਲੇ ਗੁਰਕੇ ਪਾਣੇ ਜਾਂਦਾ ਉਹ ਤੇ ਰੂ ਕਰੇ ਫੋਜ਼ਾਰ ਨੂੰ ਭਜਦਾ ਕਦੇ ਖੇਚ ਨੂੰ ਭਜਦਾ ਡੁੱਬਦਾ ਡੁੱਬਦਾ ਜਾ ਰਹੂਗਾ ਕਦੇ ਉਧਰ ਨੂੰ ਭਜਦਾ ਕਦੇ ਉਧਰ ਨੂੰ ਭਜਦਾ ਕਦੇ ਉਧਰ ਫੈਸਲਾ ਨਹੀਂ ਕਰ ਸਕਦਾ ਕਿ ਕੀ ਕਰਾਂ ਅਤਾਰ ਰਹਾਵ ਅਤਾਰ ਰਹਾਵ ਅਦਰ ਵਿਚਾਲਿਆ ਦਾ ਵਾਟ ਚਈ ਅਦ ਵਾਟਾ ਸੁਟਾ ਸੰਤ ਦਾ ਦੋਖੀ ਸੰਤ ਦਾ ਦੋਖੀ ਅਦਬੀਜ ਤੇ ਸੁਟੇ ਸੰਤ ਦਾ ਦੋਖੀ ਕਹਣਾ ਇਹ ਲੋ ਜੀ ਲੋ ਰਫਾ ਹਾਂ ਮੈਂ ਕੋਈ ਸਰਸਕ ਤਾਂ ਸੰਤ ਕਹਦਾ ਮੈਂ ਕੋਈ ਦਰਸਨ ਸਰਸਕ ਸਾਖਾ ਦਾ ਇਸ ਪਾਸੇ ਉਹ ਅਤਰ ਦੇ ਵਿੱਚ ਹੁਣ ਤੁਰਦਾ ਚੀ ਹਾਂ ਨਹੀਂ ਹੁਕਮੇ ਉਪਜੇ ਹੁਕਮੀ ਸਮਾਵੇ ਹੁਕਮਾ ਉਪਜੇ ਜਦ ਕੇ ਖੁਦ ਹੁਕਮ ਦੇ ਨਾਲ ਪੈਦਾ ਹੋਇਆ ਹੋ ਆਪ ਉਹਦੇ ਜਮੇ ਹੁਕਮ ਨਾਲ ਤੂੰ ਆਪਣਾ ਹੋਂਦ ਤੋਂ ਤਾਂ ਕਰ ਲਿਆ ਆਪਣੇ ਕੁਬਤ ਕਮਾਨ ਹੋ ਜਿਹੜਾ ਹੈ ਅਵੜੇ ਕੁਬਤ ਦੀ ਕਮਾਨ ਕਰਦਾ ਹੈ ਹੁਕਮ ਸਮਾਵਾ ਉਹ ਸਮਾਉਂਦਾ ਵੀ ਹੁਕਮ ਜੇ ਆ ਜੇ ਪੈਦਾ ਹੁੰਦਾ ਜੈਸੇ ਉਪਜੀਦਾ ਹਨ ਵੀ ਉਹ ਜਿੱਥੋਂ ਪੈਦਾ ਹੋਣਾ ਉਹਦੇ ਸਮਾਂ ਉਹ ਕਿਤੇ ਤੂੰ ਆਪਣਾ ਹੁਕਮ ਦੇ ਵਿੱਚ ਆਪਾਂ ਬਰਾਬਰ ਖੜਾ ਕਰ ਲਿਆ ਐਸਾ ਕਹਾਣਾ ਸ਼ੁਰੂ ਹੋਇਆ ਉਹ ਕਹਿੰਦਾ ਉਹ ਕਰਮਕਾਰ ਤੋਂ ਟਕਰਾਇਆ ਦੱਸਿਆ ਅੱਛਾ ਦਿਖਾਇਆ ਕਰਨ ਤੋਂ ਸਿੱਸੀ ਪਾਉਂਦੇ ਹੇ ਕਰਨ ਦੀ ਗੱਲ ਹੋਣੀ ਕੀ ਕਾਮੁ ਬਣਿਆ ਕਿ ਮੇ ਕਾਮੁ ਬਣਿਆ ਗਿਆ ਕਾਮੁ ਬਣਿਆ ਕਿ ਮੈਂ ਸਾਨ ਬਣ ਗਿਆ ਫਿਰ ਉਹ ਥਾ ਬੋ ਦਾ ਫਨਾਰਾ ਸ੍ਰੀਦ ਪਾਤਾ ਇਹਦਾ ਹਾਂਜੀ ਹੁਕਮੇ ਉੱਚ ਨਹੀਂ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਅਰੇ ਹੁਕਮੇ ਵਿੱਚ ਉੱਚ ਨਹੀਂ ਵਿਵਹਾਰ ਉਹ ਜੀ ਨਾ ਵਿਵਹਾਰ ਕਰਦੇ ਆਪਣਾ ਇਹੀ ਕਰਦਾ ਇੱਕ ਹੁਕਮ ਉੱਚੀ ਨੀਚ ਵਿਵਹਾਰ ਕਰਦਾ ਦੂਜਾ ਤਾਂ ਉੱਚੀ ਨੀਚ ਬੁੱਧਾਈ ਦੀ ਇੱਕ ਹੁਕਮ ਉੱਚੀ ਜ ਨਹੀਂ ਬੁੱਝਦਾ ਇਹਦਾ ਆਪਣਾ ਹੁਕਮ ਉੱਚੀ ਨੀਚ ਬੁੱਝਦਾ ਮੈਂ ਕਿੰਦਾ ਦੁਨੀਆ ਮਾਰੀ ਹੈ ਮੈਂ ਮਾਨਦਾਨਾ ਦੋ ਸਾਰੇ ਬਈ ਕੋਈ ਵੀ ਚੀਜ਼ ਹਰ ਪਖਤੋਂ ਆਪਣੇ ਆਪ ਉਸ ਚੱਗਾ ਬੁੱਝਦਾ ਸੰਕਾ ਇਹ ਉਜਵਲ ਦਾ ਆਪਣੇ ਆਪ ਨੂੰ ਜਿਵੇਂ ਚਲੋ ਪੰਡਤ ਆਪਣੇ ਆਪ ਨੂੰ ਉਜਵਲ ਕਹਿਣ ਲੱਗੇ ਸੀ ਇਸ਼ਾਰਾ ਦਉਦਨ ਨੂੰ ਅਸਲ ਨੂੰ ਕੁਝ ਨਹੀਂ ਦਾ ਵਿਹਾਰ ਕਿਉਂ ਕਰਦਾ ਕਮਾਦਾਤ ਨੇ ਦਿਮਾਗ ਕਿੱਥੋਂ ਆਇਆ ਸ਼ਾਇਦ ਖਿਆਲ ਕਿੱਥੋਂ ਪੈਦਾ ਹੋਇਆ ਉਜਵਲ ਦਾ ਜਦ ਕੋ ਉਜਵਲ ਨਹੀਂ ਇਹ ਆਪਣੇ ਬਾਣੇ ਜਾਇਆ ਆਪਣੀ ਵਰਦੀ ਜੀ ਦੀ ਕਰੀ ਹੋਈ ਹੈ ਇਹ ਧਰਮ ਪਰਮੇਸ਼ਰ ਦਾ ਜਿਹਦੀ ਮਰਜ਼ੀ ਦਾ ਧਰਮ ਹੈ اے 닮انا हो गया, ہے سچ تو نہ ہو گیا نے کر لےธรรม بالکل کھ بجلی جو کوئی کہے کام نہیں سکتا बहुत नुकसान हो रहा نقصان ہو رہا ہے اور ہوتا رہ گا۔ یہ تو نقصان کرنے والا ہی ہے فائدہ ادم کوئی نہیں ہے۔ ہاں اونچنی دی بہار اے ਉਹਕਿ ਮੈਂ ਅਨਦਰਮ ਉਪਰ ਕਾ ਜਿਹੜੇ ਅਨਦਰਮ ਹੋਏ ਨੇ ਨੇ ਕਹਿੰਦੇ ਸੁਭਦਰਾ ਨੂੰ ਨੇ ਕਹਿੰਦੇ ਸੁਭਦਰਾ ਗਿਆਨ ਨਹੀਂ ਨੇ ਕਹਿੰਦੇ ਸੁਭਦਰਾ ਮੱਤਾਂ ਦੇ ਬੱਤਾਂ ਨੇ ਰੰਦ ਸਭ ਤੋਂ ਸੁਭੂ ਭਗਤੀਆਂ ਅਸੰਗ ਜਪ ਉਹ ਜਿਹੜੇ ਅਸੰਗ ਜਪ ਸੰਗ ਪਉ ਸੰਗ ਪੂਜਾ ਸੰਗ ਤਪਤੌਰੰਗ ਇਹ ਆਏ ਬੈਦਾ ਕਰਲੇ ਅਦਬੀ ਆਪਣੀ ਆਪਣੀ ਮਸਤੂਰੀ ਅੱਜਕੱਡੀ ਹੈ ਕੋਈ ਇਬਾਦਤ ਹੁੰਦਾ ਕੋਈ ਕੱਟ ਸੁੱਤਾ ਕੋਈ ਨਹੀਂ ਨਾ ਬੋਤਾਂਗੀ ਉਹ ਜਿਹੜੀ ਜ਼ਿਆਦਾ ਸੁੱਤੇ ਪਈ ਆ ਉਹਦੇ ਹੋਰ ਗਿਆ ਜਿਹਦੀ ਘੱਟ ਸੁੱਤੀ ਆ ਉਹ ਤਾਂ ਹੋਰ ਗਿਆ ਬੱਤਾਂ ਵਾਲੇ ਦੀ ਗੱਲ ਬੱਦੇ ਦੀ ਘੱਟ ਵਾਲੇ ਦੇ ਜਿਹੜੇ ਘੱਟ ਵਾਲੇ ਨੇ ਉਹ ਘੱਟ ਵਾਲੇ ਦੀ ਉਹ ਗੱਲ ਮੰਨਦੇ ਮੇਰੇ ਬੱਤਾਂ ਵਾਲੇ ਨੂੰ ਸਮਝ ਨਹੀਂ ਆਉਂਦੀ ਕਈ ਵਾਰ ਵੱਡਾਲੇ ਵੱਡਾਲੇ ਦੀ ਕਰਨ ਲੈਣਾ ਨੇ ਕਈ ਗੈਣਾ ਚਲ ਛੱਡੋ ਪਰੇ ਕੱਟੇ ਠੀਕ ਹੈ। ਉਹ ਕਾਟਾ ਮਾਇਆ ਦਾ ਕਾਟਾ ਬਖੇ ਰਜੀ। ਜਿੱਥੇ ਮਾਇਆ ਦਾ ਕਾਟਾ ਪੈਂਦਾ ਰਾ ਅਸਮੈ ਉਥੋਂ ਫਿਰ ਉਹ ਧਰਮ ਵਾਲਾ ਉਧਰ ਥੋੜੀ ਜਿਹੀ ਕਿ ਉਹਧਰ ਕਟਾ ਦੁੱਤਾ ਟਾਈਮ ਹੋਰ ਆਪਾਂ ਬੁੱਧ ਦਾ ਇਸਮਾਨ ਉਧਰ ਕਟਾ ਦੁੱਤਾ ਹੈ। ਹਾਂ ਜਰ ਦੇਖੇ ਆਪਣੀ ਬੁੜਾਈ ਨਾਨਕ ਸਾਹਿਬ ਮੈਂ ਰਹਾ ਸਮਾਈ। ਹੁਕਮੇ ਉੱਚ ਨੀਚਿ ਵਿਵਾਰ ਹੁਕਮੇ ਅਨਕ ਰੰਗ ਪਰਗਾ ਉਹ ਜਨੇ ਦਾ ਜਿਹੜਾ ਵਿਹਾਰ ਕਰਦਾ ਇਹ ਹੁਕਮ ਜੇ ਆਪਾਂ ਹੁਕਮੇ ਦਾ ਹੈ ਹੁਕਮੇ ਉਜਨੀ ਵਿਹਾਰ ਉਹ ਆ ਸਕਦਾ ਉਹ ਤੇ ਬਾਣਾ ਹੁਣਾ ਦਾ ਬਾਣੇ ਚ ਕਰਦਾ ਹੁਕਮੇ ਦਾ ਆਪਣਾ ਉਹ ਤਾਂ ਪਰਮੇਸ਼ਰ ਦਾ ਆ ਕੋਈ ਵਾਸਤੇ ਬਾਣੇ ਬਾਣਾ ਜਿ ਕਰਦਾ ਫਰਾਂਜੀ ਲੋਕਾਂ ਅਨੇਕ ਰੰਗ ਪ੍ਰਕਾਰ ਦਾ ਅਨੇਕ ਰੰਗ ਪ੍ਰਕਾਰ ਦੇ ਰੰਗ ਲੋਕ ਜਿਹੜੇ ਨੇ ਇਹ ਆਪਣੇ ਆਪਣੀ ਹੱਦ ਦੇ ਫੈਲਾਏ ਹੋਏ ਨੇ ਸੰਸਾਰ ਤੇ ਇਹਦੇ ਆਪਣੇ ਆਪਣੇ ਮਤਵੇ ਅਨੇਕ ਰੰਗ ਪ੍ਰਕਾਰ ਬਹੁ ਪ੍ਰਕਾਰ ਦੁਨੀਆਂ ਅਨੇਕ ਪ੍ਰਕਾਰ ਦੀ ਜੁਗਤ ਪ੍ਰਕਾਰ ਦੀ ਸੋਚ ਹੈ ਅਨੇਕ ਪ੍ਰਕਾਰ ਦਾ ਦਿਮਾਗ ਹੈ ਅਨੇਕ ਪ੍ਰਕਾਰ ਦੀ ਗੁੱਤ ਅਨੇਕ ਪ੍ਰਕਾਰ ਦਾ ਖਾਣਾ ਪੀਣਾ ਥੇਰੇ ਪ੍ਰਕਾਰ ਦਾ ਸੁਭਾਅ ਹੈ ਇਸ ਕਰਕੇ ਫਿਰ ਅਨੇਕਤਾ ਰੈਡੀ ਰਹੂਗੀ ਜਿਹਨੇ ਆਪਣੇ ਰਹਿੂਗੇ ਆਪਣੀ ਮਰਜ਼ੀ ਚ ਇਹ ਹਾਂ ਆਪਣੀ ਮਰਜ਼ੀ ਦੀ ਰਹੂਗਾ ਤਾਂ ਅਨੇਕ ਤਾਂ ਤਾਂ ਵੀ ਹੈ ਪਰ ਹੁੰਦਾ ਨਹੀਂ ਉਹ ਕਹਿੰਦਾ ਕੋਈ ਨਹੀਂ ਹੁੰਦਾ ਮੈਂ ਉੱਠ ਖੜੂਗਾ ਉਹ ਉਜੀਨੀ ਨਹੀਂ ਬੋਲਦਾ ਜੇ ਕੋਈ ਸੁੱਤਾ ਜਾਦਾ ਪਿਆ ਹੈ ਨਹੀਂ ਮੰਨਦਾ ਨਾ ਨਾ ਉਹ ਇਹ ਨਹੀਂ ਕਹਿਣਾ ਕਿ ਇਹ ਤਾਂ ਕੋਈ ਚੀਜ਼ ਜੇ ਕਿਸੇ ਦੀ ਜੇਬ ਦੇ ਵਿੱਚੋਂ 5 ਰੁਪਏ ਨੇ 50 ਰੁਪਏ ਦਾ ਘਰ ਪਾਇਆ ਜੇਬ ਵਿੱਚ ਨਹੀਂ ਫਿਰਦਾ ਹੋ 5 ਘਰ ਉਹਨੇ ਤਾਂ ਵੇਚਣ 50 ਰੁਪਏ ਪਾਣੀ ਹੈ ਜਦੋਂ ਤੇ ਉਹ ਨੂੰ ਤੁਸੀਂ ਜਿਵੇਂ ਕਹਦਾ ਕੋਈ ਵੇਨਾ ਕਰ ਇਹਨੂੰ ਤੁਹਾਡੀਆਂ ਗੱਲ ਨਹੀਂ ਗੱਲ ਰਹਿ ਤਾਂ ਵਧੀਆ ਹਾਂ ਅਸਲੀ ਕਰਦਾ ਸੂ ਮੈਂ ਕਿ ਆ ਕੋਈ ਜੇਬ ਜੋ ਕੱਢੂਗਾ ਇੱਦਾਂ ਸੀ ਇਹ ਕਹਾਂਗੇ ਉਹ ਜਿਹੜਾ ਘਾਟਾ ਗੱਲਾਂ ਵਾਲਾ ਜਿਆਦਾ ਸੁਤਾ ਬੈ ਉਹ ਨੂੰ ਅਸੀਂ ਨਾ ਬਤ ਕਰਦੇ ਆਂ ਐਤੇ ਉਹ ਨੂੰ ਸਲਾਹ ਸਾਡੇ ਵੀ ਕਈ ਵਾਰ ਅਸੀਂ ਉਲਟਾ ਸੋਚਦੇ ਹੁੰਦੇ ਅਸਰ ਇਹ ਦੀ ਸੋਚ ਦੀ ਗੁਰਬਾਣੀ ਹੋਰ ਗੁਰਬਾਣੀ ਵੀ ਯਾਰ ਸੰਸਾਰ ਦੀ ਸੋਚ ਆ ਜਾਂਦੀ ਜਿਵੇਂ ਸੰਸਾਰ ਦੇ ਵਿੱਚ ਫਿੱਕਰ ਪਈਆ ਜੇਬ ਚੋਗੈ ਨਾ ਢੰਗ ਮੇਕਾਰ ਭਾਈ ਰੱਖੇ ਰੋਜ਼ ਤਨਾ ਬੰਦਾ ਸਿਆਣਾ ਹਰ ਵਾ ਦੇਵ ਚੱਕੀ ਬੰਦਾ ਥਾ ਮੋਲਵੋ ਜੀ ਸਿਆਣਾ ਮੰਨਿਆ ਜੇ ਵੀ ਕੀ ਲੋੜਾ ਲੋੜੂ ਘਰੋਂ ਗਾਣੂ ਬਾ ਇੱਕ ਲਾਣ ਹੈ ਇਸ ਕਰਕੇ ਗੁਰਮਤਿ ਇੱਕੋ ਹੀ ਬਰਾਬਰ ਬੋਦੀ ਹੈ ਸਾਰੇ ਜਿਵੇਂ ਜਮਾਂ ਕੇ ਵਿਖੇ ਸਮਸਤ ਇੱਕ ਜੋਤ ਹੈ ਸਾਰਿਆਂ ਜੋਤ ਬਰਾਬਰ ਹੈ ਬਾੜਾ ਨਾ ਬਾੜਾ ਨਾ ਬਾੜਾ ਵਾੜਾ ਹੋਤਾ ਕਟਬਦ ਹੀ ਜਦ ਉੱਥੇ ਜਾਗਾਂਗੇ ਫੇਰ ਬਰਾਬਰ ਚ ਮੋਗੇ ਜੇ ਕਟਬਦ ਹੋਵੇ ਜੋਤ ਆਵੇ ਤੇ ਕਦੋਂ ਬੇ ਕਦੋਂ ਲੈ ਕੇ ਭਾਈ ਇਹ ਸੂਰਤ ਤੱਕ ਦੇ ਹੈ ਜੀ ਹੋਤਾ ਪੂਰਨ ਜੋਤ ਜਗਾਏਗਾ ਜਗਾਏ ਜਗਾਈ ਦਿਏ ਜੇ ਜਾਗੀ ਦੀ ਜੋਤ ਜਗਾ ਜਾਗੇ ਨਹੀਂ ਜਾਗਤ ਜੋਤ ਜਪਾਏ ਨਸਵਸ ਜਪਾਏ ਨਸਵਸ ਜੇ ਸਾਰੀ ਜਾਗ ਜੂ ਉਹਨੂੰ ਜਪਣਾ ਨੂੰ ਸਮਝਣਾ ਕਿ ਜਾਗਦੇ ਕੇ ਜਾਗਦੇ ਕੋ ਜਾਗਦਾ ਬਨੇ ਜਾਗਦੇ ਜਾਗਦੇ ਸਾਰਿਆਂ ਦੀ ਇੱਕ ਗੱਲ ਹੈ ਮੇਰੇ ਦਿਸਾਰੇ ਕਥੇ ਜਾਗਦੇਆਂ ਜਾਗਦੇਆਂ ਦੀ ਗੱਲ ਮਿਲ ਜਾਂਦੀ ਹੈ ਇਸ ਮਤਲਬ ਇਹ ਨਹੀਂ ਕਿ ਉਹ ਤੁਰਕੇ ਜਾ ਕੇ ਮਰ ਨੇ ਉਹਾਂ ਦੀ ਸੁਰ ਮਿਲਦੀ ਹੈ ਇੱਕ ਸੁਰ ਇੱਕ ਸੋਜ ਮਿਲਦੀ ਹੈ ਉਹਨਾਂ ਦੀ ਇੱਕ ਸੁਭਾਅ ਇੱਕ ਹੈ चालक प्रेमक रामदेव का रूपक एक है इस तरीके दिए थे तफरक नहीं है जित तक फर्क पर फर्क दूर करना श्री कृष्ण में फर्क दूर करने वास्ते श्री कृष्ण साजी है फर्क रखण वास्ते नहीं साजी फर्क मडौण वास्ते साजी फर्क है ਪ੍ਰੈਕਟੀਕਲੀ ਪਰ ਗੁਰਬਾਨੀ ਫਰਕ ਮਡਾਰ ਰਿਹਾ ਜਾਂ ਦੂਰ ਕਰ ਰਿਹਾ ਕੁਝ ਲੋਕ ਕਹਿੰਦੇ ਨੇ ਫਰਕ ਜੂੜ ਰੱਖਣਾ ਮਿਟਰਡੀ ਜਨ ਕੋਨਾ ਦੋਹਾਂ ਦਾ ਵਿੱਚ ਵਿਰੋਧ ਰਹਿੰਦਾ ਇਹਨਾ ਦੋਹਾਂ ਧੜਿਆਂ ਦਾ ਵਿਰੋਧ ਰਹਿੰਦਾ ਤੇ ਵੀ ਚਾਹੁੰਦੇ ਨੇ ਕਿ ਫਰਕ ਰਹੇ ਰਾਖਸ਼ ਵੀ ਚਾਹੁੰਦਾ ਨੇ ਫਰਕ ਰਹੇ ਉਚਾਲੇ ਵਾਲੇ ਬ੍ਰਹਮਾ ਨਹੀਂ ਜੰਮੋ ਰਾਜਾ ਵੀ ਜਾਂਦਾ ਫਰਕ ਹੈ ਸਾਧੂ ਵੀ ਜਾਂਦਾ ਫਰਕ ਹੈ ਉਹਦੇ ਵਿੱਚ ਇਹ ਲੈ 40 ਜਿਹੜਾ ਕੋਈ ਨਹੀਂ ਹੋਣ ਉਹ ਕਹਿੰਦਾ ਫਰਕ ਨਾ ਇੱਕ ਤਾਂ ਹੋਵੇ ਸਾਡੇ ਕਪੜੇ ਕੋਈ ਕਹੇ ਜਪਾ ਲੋ ਬੰਦੂ ਇਸ ਕਰਕੇ ਜਿਹੜਾ ਗੁਰੂ ਗਿਆਨ ਇਹ ਇੱਕ ਦੀ ਗੱਲ ਕਰਦਾ ਉਹ ਇੱਟਾ ਜੀ ਉਹ ਤਾਂ ਰੱਬ ਨਾਲ ਦੀ ਗੱਲ ਕਰਦੇ ਨੇ ਦੋਏ ਇਹ ਧੜਾ ਜੀ ਤੜਾ ਹੈ ਵੀ ਤੜਾ ਹੈ ਵੀ ਤੜਾ ਸੱਚ ਨਾਲ ਹੈ ਇਹਨਾਂ ਦਾ ਝੂਠ ਨਾਲ ਨਹੀਂ ਇੱਕ ਮਾਇਆ ਹੈ ਝੂਠਾ ਇਹ ਸੱਚ ਮਾਇਆ ਵਾਸਤੇ ਤੜਾ ਨਹੀਂ ਹੈ ਕਲੇ ਦਾ ਕਾਰਨ ਮਾਇਆ ਨਹੀਂ ਹੈ ਕਲੇ ਦਾ ਕਾਰਨ ਸੱਚ ਹੈ ਸੱਚ ਦੀ ਛਾਣਾ ਇਹ ਨਹੀਂ ਸੀ ਗੁਰੂ ਦਾ ਤਾਂ ਕੋਈ ਫਸਦਾਂ ਨਹੀਂ ਇਹ ਹੀ ਹਾਂਜੀ ਕਰ ਕਰ ਦੇਖੇ ਆਪਣੀ ਬੜਿਆਈ ਨਾਨਕ ਸਾਹਮੇ ਰਿਹਾ ਸਮਾਈ ਕਰ ਕਰ ਦੇਖੇ ਆਪਣੀ ਬੜਿਆਈ ਕਰ ਕਰ ਦੇਖਦਾ ਕੀ ਹੈ ਤੇਹਰਾ ਕੀਆ ਜਿਹੜੀ ਕੁਦਰਤ ਹੈ ਹੀ ਦੇਖਦਾ ਕੁਦਰਤ ਉਹ ਵੀ ਬੜਿਆਈ ਜੇ ਜੋ ਕਰਦਾ ਉਹ ਉਹਦੀ ਬੜਿਆਈ ਹੈ ਜੋ ਕੋਚੋ ਦੀ ਕਰਦਾ ਹੋਈ ਉਹਦੀ ਬੜਿਆਈ ਹੈ ਹਰ ਜਿਹਦਾ ਦਿਆ ਕਰਦੈ ਲੋਕਾਂ ਨੇ लोगो नु जालु करना है कैंदे ने या थतरन ने जालु कौन हरन है वो बुड्ढे दाता दाता नथरण ने दादा कौन हरन है ते जनता जाति उन ने देना दासा धदा दासा ने जरूर बताइए मजे रे ਪੈਦਾ ਕਰਕੇ ਸਭ ਕੋ ਜੋ ਦੇਖ ਰਹੇ ਨੇ ਕੋਈ ਝੂਠ ਬਣਾਤਾ ਝੂਠ ਨੂੰ ਕੰਟਰੋਲ ਵਿੱਚ ਰੱਖਦਾ ਇਹ ਨਹੀਂ ਹੋਣਾ ਚਾਹਤਾ ਜਿਹਦੇ ਬੰਦੀ ਤੁਰਿਆ ਦੇ ਪਾਸੇ ਲੱਗਦੀ ਹਾਂ ਸਰਕਾਰ ਦੇਖੇ ਸਭ ਮੇਰੇ ਹਸਮਾਈ ਸਭ ਉਹ ਸ਼ਬਦ ਥਾਪਾ ਥਾਪੋ ਸ਼ੁਰੂ ਹੋਈ ਸੀ ਗੱਲ ਆਪੋ ਦਾ ਆਪਣਾ ਦੇ ਬੰਦੂਗੋ ਕੇ ਫਿਰ ਵੀ ਥਾਪੋ ਥਾਪਣਾ ਹਰ ਉਹ ਥਾਪਦ ਨੂੰ ਦੇਖਦਾ ਵੀ ਕਰਕੇ ਫਿਰ ਹਾਂ ਜਿਹਨੂੰ ਥਾਪਦਾ ਉਹਨੂੰ ਦੇਖਦਾ ਵੀ ਸੰਭਾਲ ਵੀ ਰੱਖਦਾ ਖਾਨਪੀਰ ਦਾ ਪ੍ਰਬੰਧ ਸਭ ਕੁਝ ਕਰਦਾ ਪੈਦਾ ਨਹੀਂ ਕਰਦਾ ਹੈ ਥਾਪਦਾ ਵੀ ਅਜੇ ਪੈਦਾ ਵੀ ਕਰਦਾ ਤਾਂ ਉਹਨੂੰ ਉਹਨਾਂ ਦੀ ਦੇਖਭਾਲ ਦਾ ਵੀ ਚੰਗਾ ਲੱਗਦਾ ਦੇਖਣ ਨੂੰ ਦੇਖਭਾਲ ਵਾਲੀ ਜਿਹੜੀ ਫੌਦੇ ਵੀ ਥੜੀ ਹੈ ਬਹੁਤ ਕੁਝ ਹੈ ਹਵਾ ਵੀ ਹੋ ਜੀਏ ਪੈਦਾਵਾਰ ਹੋਣੀ ਚਾਹੀਦੀ ਹੈ ਫਲ ਫੁੱਲ ਲੱਗਣੇ ਚਾਹੀਦੇ ਨੇ ਬਹੁਤ ਸਭ ਸਭ ਦਾ ਜਦ ਤੱਕ ਅਸੀਂ ਸੁਣ ਗਏ ਆਪਣੀ ਵਿਧੀ ਸਾਹਿਬ ਨੇ ਇਹਨਾਂ ਸਮਾਇਆ ਸਾਰਿਆਂ ਨੂੰ ਸਮਾਇਆ ਹੋਇਆ ਸਮਾਈ ਜੋ ਹੈ ਨਾ ਫਿਰ ਉਹ ਗੱਲ ਆ ਗਈ ਜੀ ਜਿਹੜਾ ਪਾਪ ਸਾਗਰ ਨਾਉਂਦੀ ਹੈ ਤੇ ਕੋਈ ਚੀਜ਼ ਨਹੀਂ ਹਮਰੇ ਨੂੰ ਸਮਝਦਾ ਨਹੀਂ ਤਾਂ ਸਭ ਮੈਂ ਤਾਂ ਸੱਚ ਹੱਟ ਸਦਾ ਹੈ ਸਭ ਮੈਂ ਤਾਂ ਹੁਕਮ ਹਮਾਇਆ ਹੋਇਆ ਹੈ ਇਹ ਤਾਂ ਸੁੱਤੇ ਕਰਕੇ ਹੁਕਮ ਨੂੰ ਟੁੱਟਿਆ ਹੋਇਆ ਹੈ ਤੇ ਜਾਗੂ ਹੋਪੂ ਬਲ ਜੜੀਊਗਾ ਸੁਪਨਾ ਦੇਖ ਰਿਹਾ ਕੁਕਬੀ ਹੋਈ ਹੈ ਦੇਖੋ ਸੁਣ ਸਮਾਦ ਆਨ ਤਹਿ ਨਾ ਆਵੇ ਉਹ ਉਸ ਤਰ੍ਹਾਂ ਅੱਜ ਸਮਝਾਉ ਬਹੁਤ ਬਾਹਰ ਹੈ ਤੇ ਸਟੈਸ ਕੀਤਾ ਹੈ ਤੇ ਸਮਝਾਏਗਾ ਕਹਿੰਦੇ ਜਿੱਥੇ ਮੰਨਣਾ ਸੁਪਰ ਸਮਾਧੀ ਲੌੜੀਆਂ ਉੱਥੇ ਹੀ ਨਾਦ ਪ੍ਰਗਟ ਹੋਣਾ ਉੱਥੇ ਹੀ ਇਹਦਾ ਮਸਾਖਾਡ ਉੱਥਈਆ ਇਹਦੀ ਅਵਸਥਾ ਬਦਲਣੇ ਸੱਚਾ ਜਾਂਦਾ ਹੁਣ ਇਹਨੂੰ ਬਦਲ ਸਕਦਾ ਨਹੀਂ ਤਾਂ ਸੁਪਨੇ ਕਰਕੇ ਫਿਰ ਸੱਚਾ ਕਰਕੇ ਜਾਗਦੇ ਕਰਕੇ ਇਹ ਹੁਣ ਵਾਲੀ ਅੱਖ ਹੀ ਨਹੀਂ ਜੜੀਏ ਜੇ ਕਲਪਨਾ ਜਦੋਂ ਜਿੱਥੇ ਕਲਪਨਾ ਬੰਦ ਹੋਣੀ ਹੈ ਤੁਸੀਂ ਬੁੱਕੜਾ ਬੰਦ ਕਰਦੇ ਨੇ ਜੰਨੀਆਂ ਰੋੜਾ ਤੋਂ ਬਾਹਰ ਨਿਕਲ ਜਾਣਾ دنیہ نیاں اچھاں لوڑاں تو باہر نکل جے جاد جتے کھڑے آوے بیٹھے ہو اوتھے ہی شوبد پرکٹ ہووے اوتھے صرف کی بدلنا ہے اوتھے او سپنا ٹوٹ جانا جادر تو وسہ ہو جاوے ہور کچھ نہیں ہووے سپنا تو باہر اونا صرف سپنا تو باہر اونا دنیا ہو رو دنیا ہوے دنیا بدلنی دنیا جل بھول جانے پھر ਉਹ ਤਾਂ ਸਹੀ ਗੱਲ ਇੱਕ ਘੜੀ ਨਾ ਤਾਂ ਕਰ ਜੋ ਹੁੰਦਾ ਹਰ ਵਿਸਰਤ ਸਦਾ ਖਵਾਰੀ ਤਾਂ ਹੈ ਸਹੀ ਉਹੀ ਗੱਲ ਜਿਹੜੀ ਕਹਿੰਸੀ ਹਰ ਵਿਸਰਤ ਸਦਾ ਕੋ ਖਵਾਰੀ ਕੋਈ ਵੀ ਜਦੋਂ ਅਸੀਂ ਕੋਈ ਹੋਰ ਗੱਲ ਗੱਲ ਕਰਨ ਲੱਗ ਜੀਓ ਇੱਧਰ ਆ ਗੱਲ ਨਹੀਂ ਕਰਦੇ ਤਾਂ ਉਹ ਐ ਲੱਗਦਾ ਵੀ ਕਲਪਨਾ ਸ਼ੁਰੂ ਹੋ ਗਈ ਜੁਦੀ ਅਬੀਤ ਦਿਆਂ ਦੇ ਵਿੱਚ ਸੁੱਤ ਚਲੀ ਗਈ। ਸੁਨਿਆਪੀ ਕੱਲਾ ਦਾ ਕੋਈ ਫਿਗਰ ਪੈ ਗਿਆ। ਉਹਦੇ ਤੇ ਉਹ ਜ ਪੈਣ ਲੱਗਿਆ। ਮੰਨਦੇ ਤੇ ਉਹ ਜ ਪੈਣਾ ਸਰ ਜਿਹੜਾ ਹੈਗਾ ਇਹ ਕਲਜੂ ਹੈ। ਜਦ ਤੇ ਪੈਸਵਾਰ ਹੁੰਦੀ ਹੈ ਕਲਜੂ ਕਲਪਨਾ ਨਹੀਂ ਹੁੰਦੀ ਕੁਝ ਵੀ। ਕਲਪਨਾ ਹੋਵੇ ਨਾ ਹੋਵੇ। ਅਵਸਥਾ ਚੇਜ ਹੋਣੀ ਅਵਸਥਾ ਚੇਜ ਹੋਣੀ ਹੋਰ ਅਸਕੇ ਨੋ ਨੀ ਪੈਸੇ ਕੰਪਨ ਹੁੰਦੀ ਹੋਈ ਆ ਪੈਸੇ ਵੀ ਤਾਂ ਕਰਨਾ ਹੋ ਰਹੀ ਹੋਈ ਇਹ ਤਾਂ ਫਿਰ ਹੈ ਹੀ ਜਦ ਕਿ ਆ ਵੀ ਇਹ ਜਗਤ ਤੁਨ ਦਾ ਪਹਾੜ ਫੇਤਾ ਪਰਬਦਾ ਪਹਾੜ ਪਰਬੇ ਕੋਲਾ ਤੈਨ੍ਹ ਜਿੰਦਾਂ ਨੇ ਜੇ ਪਰਮ ਤੇ ਜਿਸੇ ਨਹੀਂ ਹਾਂ ਜੇ ਪਰਮ ਤੇ ਦਾਦ ਸਾਂਹੇ ਦਾ ਸੰਸਾਰ ਹੈ ਕਬੀਰ ਜੀ ਕਿਹਾ ਹੁੰਦੀ ਸਭੂ ਤੇ ਸਾਰੇ ਸਭੂ ਸੁਪਨਾ ਬਖਤ ਬੁੱਤੀ ਸਾਰੇ ਦਿਸਾ ਭੁਲ ਜਾਂਦੀਆਂ ਤੇ ਚੜੀ ਨਾ ਕੋਈ ਅਵਸਥਾ ਬਗਲ ਨਹੀਂ ਕੁਛ ਨਹੀਂ ਹੈ ਉਹਨੂੰ ਸਹਿਗ ਅਵਸਥਾ ਦਾ ਸਾਜੋ ਸਾਜੋ ਜਾਗਰਤ ਵਾਸਤਾ ਉਸੇ ਨੂੰ ਦੁਨੀਆ ਵਾਸਤਾ ਕਹਿੰਦੇ